ਸ਼ਲੋਕ ਕਗੀਰ ਕਸੋਟੀ RAM ਕੀ ਝੂਠਾ ਟਿਕੈ ਨਾ ਕੋਈ RAM ਕਸੋਟੀ ਸੋ ਸਹ ਜੋ ਮਰ ਜੀਵਾ ਹੋਈ ਕੋਈ ਕਹਦਾ ਕਿ RAM ਦੀ ਕਸੋਟੀ ਕਸਵਟੀ ਹੁੰਦੀ ਹੈ ਨਾ ਸੁਨਿਆਰ ਕੋਲ ਕਸਵਟੀ ਹੁੰਦੀ ਹੈ ਖਰਾ ਘੋਟਾ ਪਰਖਣ ਦੀ ਪਥਰੀ ਜੀ ਹੁੰਦੀ ਉਹਨੂੰ ਕਹਿੰਦੇ ਨੇ ਹਾਂਜੀ ਮੈਂ ਦੇਖੀ ਜੀ ਕਿਹੜੇ ਝੂਠੇ ਗੁਰੂ ਨੇ ਨਾ ਉਹ ਜਿਹੜਾ ਕੁਝ ਗੱਲ ਕਹਿੰਦੇ ਨੇ ਮੰਤਰ ਨੇ ਜਾਂ ਜੋ ਵੀ ਜੇ ਉਹ ਕਾਇਦੇ ਹੈ ਗਿਆਨ ਨੂੰ ਵੀ ਮੈਂ ਕਿਤੇ ਪਰਖ ਲਿਆ ਮੈਂ ਇਹਨੂੰ ਉਹ ਕਹਿੰਦਾ ਨਾ ਚੱਦਾ ਵਕ ਸਾਡੇ ਤੋਂ ਹਾਂ ਜਿਹੜਾ ਸੱਚਾ ਗੁਰੂ ਕਹਿੰਦਾ ਤੁਸੀਂ ਪਹਿਲਾਂ ਬਸ ਸੁਣ ਕੇ ਤੋਕੀ ਦੇ ਬੱਸ ਭਾਈ ਜਿਹੜੀ ਮੈਂ ਗੱਲ ਕਹੀ ਬਾਜ਼ਾਰ ਚ ਲੈ ਜਾ ਇਹ ਕਹੇ ਦਲ ਤੈ ਮੇਰੀ ਮੋੜ ਨਾ ਮੰਨੀ ਜੇ ਇਹਨੂੰ ਕੋਈ ਗਲਤ ਸਾਫਤ ਨਾ ਕਰ ਸਕੇ ਫਿਰ ਮਨ ਝੂਠੇ ਨਹੀਂ ਇਹ ਗੱਲ ਕਹਿੰਦੇ ਗੁਰੂ ਉਹ ਕਹਿੰਦੇ ਜੇ ਦੂਵੇ ਤੇ ਕਹੇ ਗੰਨ ਸਾਡੀ ਹੋਰ ਕਿਸੇ ਦੇ ਚਾਹੇ ਪਰਖਾਉਣੇ ਤਾਂ ਅਸੀਂ ਜਾ ਸਾਡਾ ਤੇਨ ਕੋਈ ਸੰਬੰਧ ਨਹੀਂ ਝੂਠਾ ਗੁਰੂ ਨਹੀਂ ਦਿੱਖਦਾ ਤਾਂ ਸੋਟੀ ਤੇ ਜੇ ਕਸਵਟੀ ਤੇ ਤੁਸੀਂ ਉਹਦੇ ਜਾਨ ਨੂੰ ਉਹਦੀ ਕਹਾਣੀ ਬਾਜ਼ਾਰ ਚ ਲੈ ਜਾਓ ਪਰਖਾਉਣ ਵਾਸਤੇ ਕਿਸੇ ਤੇ ਹੋਰ ਤੇ ਪਰਖਣ ਵਾਸਤੇ ਸੱਚ ਆਇਆ ਝੂਠ ਹੈ ਉਹ ਕਹਿੰਦੇ ਨਹੀਂ ਇਹ ਨਹੀਂ ਗੱਲ ਹੈਗੀ ਸਰਦਾਰ ਜੇ ਅਸੀਂ ਚਾਹੇ ਤਾਂ ਇਹ ਪਰਖਣ ਦਾ ਮਤਲਬ ਨਹੀਂ ਅਰੇ ਜਾਨਾ ਨਾ ਪ੍ਰਾਪਤ ਬਿਨਾ ਹੋਰ ਕੋਈ ਗੱਲ ਨੇ ਕਹਿੰਦੇ ਨੇ ਰਾਗ ਮਾਮੇ ਵੀ ਕਹਿੰਦੇ ਨੇ ਦੂਜੇ ਦੀ ਗੱਲ ਨਾ ਸੁਣੋ ਦੂਜੇ ਦੀ ਗੱਲ ਜੇ ਸੁਣੋਗੇ ਤਾਂ ਉਹ ਤੁਹਾਡੀ ਗੁਰਬਾਣੀ ਹੀ ਨਹੀਂ ਕਹਿੰਦੀ ਇਹ ਗੱਲ ਸੱਚ ਮਰਜੀ ਲੈ ਜਾ ਹਰਖਰਾ ਜਿਹੜਾ ਰਾਮ ਤੁਹਾਡੀ ਦੇ ਟਿਕ ਜੂਏ ਉਹ ਅਰਜੀਵਾ ਹੁੰਦਾ ਮਰ ਕੇ ਕਿਉਂਦਾ ਹੋਇਆ ਹਰ ਹੁੰਦਾ ਸ਼ਬਦ ਮਰਿਆ ਮਰਿਆ ਫਿਰ ਜਿਹੜਾ ਗੁਰਬਾਣੀ ਇਹਨਾਂ ਨੇ ਰੱਤੀਆ ਮਰ ਜੀਵੇ ਨੇ ਸਰ ਮਰ ਕੇ ਜਿਉਂਦੇ ਹੋਏ ਨੇ ਸੱਜੀ ਬਣ ਹੋਇਆ ਹੈ ਉਹਨਾਂ ਨੂੰ ਯਾਨੀ ਉਹਨਾਂ ਨੂੰ ਜਨਮ ਪਦਾਰਥ ਮਿਲਿਆ ਹੋਇਆ ਹੈ ਸ਼ਬਦ ਮਰੇ ਮਰਿਆ ਤੋਂ ਜੀਵੇ ਉਹ ਮਰਜੀ ਹੁੰਦਾ ਜਿਹੜਾ ਰਾਮਕਸਬੜੀ ਤੇ ਖੜਾ ਉਤਰੇ ਰਾਮਕਸਬੜੀ ਇਹ ਵੀ ਹੈ ਪਹਿਲਾਂ ਮਰਨ ਸਬੂਲ ਇੰਨੇ ਤਾਂ ਅੱਜੇ ਤਾਈਂ ਹੈ ਮੇਰੀ ਗੱਲ ਮੰਨਣੀ ਹੈ ਸਾਡੇ ਨਾਲ ਤਾਰੇ ਕੋ ਬੈਠਣਾ ਹੈ ਕਬੀਰ ਕਹਿੰਦਾ ਇਹ ਤਨ ਜਾਏਗਾ ਸਰੀਰ ਨੀ ਰਹਿਣਾ ਹੈਗਾ ਕਮਣੇ ਮਾਰਗ ਲਾਇਏ ਐ ਸੰਗਤ ਕਰ ਸਾਧੀ ਤਾਹਰ ਜੈਗੁੰਦਾ ਹੈ ਵੀ ਸਰੀਰ ਕ ਤਨੇ ਅਸੀਂ ਬਚਾ ਸਕਦੇ ਤੈਨੂੰ ਵਿਚਾਲਾ ਆਤਮਿਕ ਤੌਰ ਤੇ ਸੌਣਾ ਜਾਗਣਾ ਜਾਗਰਤ ਹੋ ਜਾਏਗਾ ਸੌਂਦਾ ਨਹੀਂ ਮੁੜਤੇ ਗੁਰੂਮੁਖਾ ਜਾਗਾ ਨਹੀਂ ਦਾ ਸੋਵਰ ਦੁਆਰਾ ਤੁੰ ਮੇਦ ਨਹੀਂ ਆ ਸਕਦੀ ਕਿ ਇਹਨੂੰ ਸੋਵਣ ਹੋਏਗਾ ਲੰਬੇ ਗੋਲ ਫਸਾਰ ਇਸੇ ਨੂੰ ਅਸੀਂ ਸੌਣ ਨੂੰ ਬੇਹੋਸ਼ੀ ਦੀ ਹਾਲਤ ਨੂੰ ਮਰਨਾ ਕਹਿੰਦੇ ਆ ਸ਼ਰਤ ਇੱਕ ਸ਼ਰਤ ਤੇ ਝੂਠੀ ਲੱਗਦੇ ਹਨ ਜਿੰਨੇ ਝੂਠੇ ਨੇ ਇਹ ਸ਼ਰਤ ਨਹੀਂ ਮੰਨਦੇ ਮੰਨਣਾ ਨਹੀਂ ਕਬੂਲ ਕਰਦੇ ਝੂਠਾ ਡੇਣਾ ਕੋਈ ਜਿਹੜਾ ਇਹ ਸ਼ਰਤ ਮੰਨ ਲਵੇ ਮੰਨ ਕਬੂਲ ਕਰ ਲਵੇ ਉਹ ਮਰਜੀਵਾ ਹੋ ਜਾਂਦਾ ਦੋਹੇ ਪਾਸੇ ਅਰਥ ਹਲ ਜਿਹੜੇ ਸਿਆਰੇ ਨੇ ਜਿਹੜੀ ਸਿੱਖਾਂ ਨੇ ਮੰਨ ਲਈ ਇਹ ਗੱਲ ਮੰਨ ਕਬੂਲ ਕਰ ਲਿਆ ਉਹ ਮਰਜੀਵੇ ਹੋ ਗਏ ਆ ਜਿਹੜਾ ਮਰਜੀਵਾ ਫਿਰ ਗੱਲ ਜਿਹੜੀ ਕਹਿਣਾ ਉਪਦੇਸ਼ ਕਰਦਾ ਹੈ ਉਹ ਕਹਿੰਦਾ ਬਿਯਾਰ ਕੇ ਲੈ ਜਾ ਜੇ ਕਹਿ ਦੇ ਮੇਰੀ ਗੱਲ ખોਟੀ ਹੈ ਤਾਂ ਨਾ ਮੰਨੇ ਜੇ ਕੋਈ ਖੋਟੀ ਨਹੀਂ ਕਰ ਸਕਦਾ ਤੇ ਭਾਈ ਮੰਨ ਲਈ ਸਰੀ ਹੁੰਦੀ ਆ ਰਾਮ ਕਸੋਦੀ ਤੇ ਪੂਰੀ ਉਤਰਦੀ ਆ ਜਿਹੜਾ ਰਾਮ ਕਸੋਦੀ ਨੂੰ ਆਪਣੇ ਆਪ ਨੂੰ ਲਾ ਲਵੇ ਉਹ ਮਰਜੀਵਾ ਹੋ ਜਾਂਦਾ ਹਾਂਜੀ ਠੀਕ ਠੀਕ ਹੈ ਮਹੱਲਾ ਤੀਜਾ ਕਿਉਂ ਕਰ ਇਹ ਹੋਏ ਕਹਿਆ ਸ਼ਬਦ ਨਾ ਮਾਨਈ ਮਮੇ ਛੱਡੇ ਨਾ ਕੋਈ ਹਾਂ ਹੁਣ ਇਹ ਮਰਨ ਦੀ ਗੱਲ ਕਰ ਗੱਲ ਵੀ ਮਰਨਾ ਜਿਹੜਾ ਹੈਗਾ ਸਰੀਰ ਕਰਕੇ ਮਰਨ ਦੀ ਗੱਲ ਨਹੀਂ ਹੈਗੀ ਇਹ ਮਨ ਮਰਨ ਦੀ ਗੱਲ ਹੈ ਮਨ ਮਾਲਨ ਸਰੀਰ ਨਹੀਂ ਮਰਦਾ ਜੜ ਵਸਤੂ ਹੈ ਹੁੰਦੀ ਇਹ ਤਾਂ ਸਾਨੂੰ ਭਾਸ ਦੀ ਹੈ ਜਿਨ ਨਜ਼ਰੇ ਜਿਉਂਦੀ ਹੈ ਇਹ ਲੱਗਦੀ ਹੈ ਵੀ ਸਰੀਰ ਜਿਉਂਦਾ ਹੈ ਸਾਨੂੰ ਇਹ ਕਦੋਂ ਜਿਉਂਦਾ ਜੜ ਉਦਾਂ ਹੀ ਇਹ ਤਾਂ ਨਰਤਕ ਇਹਦਾ ਨੌਵੇਂ ਮਰ ਤੱਕ ਪੈਂਦਾ ਗੁਰਬਾਣੀ ਦੇ ਵਿੱਚ ਇਹਦਾ ਨੌ ਮਰਤਕ ਪਿੰਡ ਹਾਂਜੀ ਕਿਉਂ ਕਰ ਇਹ ਮਨ ਮਾਰੀਏ ਕਿਉਂ ਕਰ ਮਰ ਤਾ ਕੋਈ ਹਾਂ ਹਾਂ ਮਨ ਕਿਵੇਂ ਮਾਰੀਏ ਨੂੰ ਮਰਤਕ ਕਿਵੇਂ ਹੋਵੇ ਸਵਾਲ ਇਹ ਹੈ ਨਾ ਮਨ ਨੂੰ ਕਿਵੇਂ ਮਾਰੀਏ ਅਸਲ ਤੇ ਮਨ ਦੇ ਵਿੱਚ ਜਿਹੜੀ ਇੱਛਾ ਪੈਦਾ ਹੁੰਦੀ ਹੈ ਲੋਭ ਲਹਿਰ ਹੈ ਤੇਰੀ ਮਰਜ਼ੀ ਹੈ ਮਨ ਦੀ ਉਹੀ ਪਿਆਗਣੀ ਆ ਫਿਰ ਨਹੀਂ ਛੱਡਦੇ ਬਸ ਇਹ ਗਿਆ ਠੀਕ ਮਨ ਨੇ ਆਪਣੀ ਮਰਜ਼ੀ ਉਹ ਛੱਡਦੀ ਜਿਹੜਾ ਅਜੇ ਵੀ ਮਰਜ਼ੀ ਹੋਈ ਨਹੀਂ ਹੈ ਉਹ ਮਰੇ ਆਏ ਇਹ ਜਿੰਦਾ ਕਹਦਾ ਉਹ ਤਾਂ ਜੀਵਨ ਦਾ ਮਤਲਬ ਕੀ ਰਹਿ ਗਿਆ ਇਹ ਕਿਉਂ ਕਰੇ ਮਨ ਮਾਰੀਏ ਤੇ ਮੇਰੇ ਤੇ ਕਿਵੇਂ ਹੋਵੇ ਮਨ ਹਾਂਜੀ ਅੱਗੇ ਕਹਿਆ ਸ਼ਬਦ ਨਾ ਮੰਨਾ ਹੀ ਹੋਮੇ ਛੱਡੇ ਨਾ ਕੋਈ ਕਿਉਂਕਿ ਜਿਹੜਾ ਕਹਿਆ ਸ਼ਬਦ ਆ ਕਹਿੰਦੀ ਇਹ ਤਾਂ ਮੰਦਾ ਨਹੀਂ ਇਹ ਜੇ ਮਨ ਲਵੇ ਤਾਂ ਮਰ ਜਵੇ ਹੋ ਮੈਂ ਨਹੀਂ ਛੱਡਦਾ ਆਪਣੀ ਮਰਜ਼ੀ ਨਹੀਂ ਛੱਡਦਾ ਤਾਂ ਕਰਕੇ ਗੁਰੂ ਦੀ ਗੱਲ ਨਹੀਂ ਮੰਨ ਜੇ ਗੁਰੂ ਦੀ ਗੱਲ ਮੰਨ ਲਵੇ ਤਾਂ ਆਪਣੀ ਮਰਜ਼ੀ ਛੱਡ ਲੂੰ ਆਪਣੀ ਮਰਜ਼ੀ ਨਹੀਂ ਛੱਡਦਾ ਫਿਰ ਗੁਰਬਾਨੀ ਨਹੀਂ ਕਿਆ ਦਾ ਇਹਦੀ ਕਿਰਪਾ ਨਾਲ ਇਹ ਜੇ ਸਮਝ ਜਵੇ ਛੱਡ ਦਿੰਦਾ ਨਫਾ ਨੁਕਸਾਨ ਸਮਝੇ ਆਪਣੀ ਗੁਰੂ ਦੀ ਗੱਲ ਮੰਨ ਕੇ ਮੈਨੂੰ ਫਾਇਦਾ ਹੈ ਜਾਂ ਨੁਕਸਾਨ ਇਹ ਵਪਾਰੀ ਹੈ ਨਫੇ ਨੁਕਸਾਨ ਤੇ ਉੱਤੇ ਲਿਆ ਕੇ ਗੱਲ ਨੂੰ ਛੱਡਦਾ ਭਾਈ ਤੇਰਾ ਇੰਨਾ ਕੀਮਤੀ ਜਨਮ ਹੈ ਤੈਨੂੰ ਮਿਲਿਆ ਹੋਇਆ ਮਰਖਾ ਜੇ ਤੇਰਾ ਆਹੀ ਚਲਾ ਗਿਆ ਦੇਖੀ ਕਿੰਨਾ ਨੁਕਸਾਨ ਹੈ ਤੇਰਾ ਵੀ ਅੱਛਾ ਜੇ ਤੈ ਚਲੋ ਆਪਾਂ ਨਹੀਂ ਮੰਨਦੇ ਗੁਰਮਤ ਨੂੰ ਮਾਇਆ ਦੇ ਵਿੱਚ ਜੀਵਨ ਮਾਰਟ ਹੈ ਜੋ ਪਕਾਉਣਾ ਇੱਥੇ ਰਹਿ ਜਾਣਾ ਤਾਂ ਨਾਲ ਜਾਣਾ ਨਹੀਂ ਹੈ ਕਿ ਕਰਕੇ ਇਸ ਲੈਵਲ ਤੇ ਨੂੰ ਲਿਆ ਕੇ ਫਿਰ ਇਹ ਫੈਸਲਾ ਕਰਦਾ ਵੀ ਹਾਂ ਘਰ ਤਾਂ ਠੀਕ ਹੈ ਵੀ ਉਹ ਬਾਕੀ ਤਾਂ ਦਸਮ ਬਾਸ਼ਾ ਕਹਿੰਦੇ ਨੇ ਬਾਬੇ ਕੇ ਬਾਬਰ ਕੇ ਦੋ ਗੁਰਮੁਖ ਨੇ ਬਾਬੇ ਕੇ ਬਾਬੇ ਨਹੀਂ ਬਾਬੇ ਕੇ ਲਫਜ਼ ਆਸ ਬਾਬੇ ਕੇ ਹਾਂ ਬਾਬੇ ਨਹੀਂ ਬਾਬੇ ਐਵੇਂ ਪਾਗਲਪਨ ਜਿਹਾ ਕਹਿੰਦੇ ਬਾਬੇ ਕਾ ਲੱਗ ਗਏ ਆ ਕਹਿਣ ਲੱਗੇ ਬਾਬੇ ਕੇ ਕਹਉਂਦੇ ਸੀ ਗੁਰੂ ਘਰ ਆਇ। ਇਹ ਪਰਮੇਸ਼ਰ ਦੇਣਾ ਸੀ। ਬਾਬਰ ਕੇ ਬਾਬਰ ਕੇ ਕੌਲ ਨੇ ਬਾਬਰ ਕੇ ਜਿਹੜੇ ਸੰਸਾਰੀ ਰਾਜੇ ਨੇ ਉਹਨਾਂ ਬਾਬਰ ਨਾਲ ਜਿਹੜੇ ਖੜੇ ਸੀ। ਇਹ ਨਹੀਂ ਬਾਬਰ ਕੇ ਨੇ। ਬਾਬੇ ਕਹਿੰਦੇ ਜਿਹੜੇ ਗੁਰਮੁਖ ਨਮਨਣਾਉਦੇ ਨੇ ਗੁਰਮੁਖ ਨੇ। ਇਹ ਦੋਏ ਪਰਮੇਸ਼ਰ ਨੇ ਬਣਾਏ ਨੇ। ਦੋਡੀ ਬਾਬਰ ਦਾ ਤਾਂ ਮੈਂ ਚੇਰੀ পাপ ਨੂੰ ਤੇ ਕਿਨੋਟ ਸੰਸਾਰੀ ਰਾਜ ਦਾ ਪਾਪ ਨੂੰ ਦੋਨੋਂ ਭਾਈ ਦੋ ਮਿਲ ਕੇ ਸਿੱਸਟੂ ਭਾਈ ਬਾਬੇ ਦੇ ਕੋਈ ਜਨਨ ਦੇ ਹੈ ਕਹਿੰਦੇ ਧਰ ਬਾਬੇ ਅਰਪਦੇ ਗੁਰੂ ਨੂੰ ਨਹੀਂ ਅਰਪਦੇ ਸਤਗੁਰੂ ਨੂੰ ਤਨਮਨ ਧਰ ਨਹੀਂ ਕਮਾਈ ਹੁੰਦੀ ਹੈ ਫਿਰ ਉਹ ਜੰਮਦੂਤ ਲੈ ਨਾਂ ਮੇਰੇ ਅੱਗੇ ਲਈਏ ਕੋਹੇ ਉਹ ਤਾਂ ਫਿਰ ਖੋਏ ਲੈਣਾ ਉਹਨਾਂ ਨੇ ਉਹ ਤਾਂ ਫਿਰ ਤੁਹਾਡੇ ਕੋਲ ਰਹਿਣਾ ਇਹ ਸੈਂਕਲ ਤੋਂ ਸਮਝਾ ਕੇ ਫਿਰ ਫੇਰਬੰਦ ਕਹਦਾ ਵੀ ਫੈਸਲਾ ਕਰਦਾ ਹਾਂ ਬਰੀ ਗੁਰਬਾਣੀ ਨੂੰ ਮੰਨਣ ਚਾਹਵਾ ਤਾਂ ਉਹ ਮੰਨਣ ਲੱਗੇ ਨੇ ਜਦੋਂ ਸਿੱਖ ਬੰਦੇ ਸੀ ਉਹ ਸਾਰੀ ਗੱਲ ਸਮਝ ਕੇ ਹੀ ਬੰਦੇ ਨੇ ਸਮਝੇ ਬਿਨਾਂ ਵਾਲੀ ਮੰਨਿਆ ਨਹੀਂ ਗਾ ਸਮਝ ਆਉਣ ਕਾਰਨ ਕੁੱਝ ਪੜੀ ਗਿਆ ਠੀਕ ਹੈ ਸਮਝ ਕੇ ਤਾਂ ਬੰਦ ਸਤਾ ਇਹ ਜਿੱਦਾਂ ਜਰ ਸਾਨੂੰ ਆਖੇ ਸਗਲ ਚ ਬਣੀ ਨਾਨਕ ਜਿਸ ਬਖਸ਼ੇ ਤਿਸ ਮਿਲੈ ਤਿਸ ਬਿਗਨ ਨ ਲੱਗੈ ਨਾ ਲੱਗੈ ਬਖਸ਼ੇ ਤੇ ਬਖਸ਼ਿਸ਼ ਪਰਮੇਸ਼ਰ ਦੀ ਉਹਨੂੰ ਉਹਨੂੰ ਗਿਆਨ ਮਿਲਦਾ ਪਹਿਲੀ ਗੱਲ ਉਹਨੂੰ ਸੰਭ ਤੇ ਉਹਨੂੰ ਮਿਲਦੀ ਹੈ ਗਿਆਨ ਇਹ ਉਹਨੂੰ ਮਿਲਦਾ ਜੇ ਉਹ ਗੁਰਮਤਿ ਜਨਮੇ ਉਹ ਜਗ੍ਹਾ ਹੋਈਵੇ ਪਰ ਉਹ ਸਿਖਾਣੇ ਕਰ ਜਨਮ ਹੋ ਗਿਆ ਨੂੰ ਮਿਲਦੀ ਜੇ ਸਿਖਾਣੇ ਜਨਮੇ ਨਾ ਹੁੰਦਾ ਤਾਂ ਗੁਰਮਤਿ ਕਿਵੇਂ ਸੁਣਨ ਇੱਕ ਬਖਸ਼ਿਸ਼ ਹੈ ਜਨਮ ਹੋ ਜਾਣਾ ਉਹ ਜਗ੍ਹਾ ਤੇ ਜਿੱਥੇ ਗੁਰਮਤਿ ਸਾਨੂੰ ਸੁਣਨ ਨੂੰ ਮਿਲਦੀ ਪਹਿਲੇ ਤਾਂ ਇਹ ਬਿਨਾਂ ਕਰਮਾਂ ਤੋਂ ਮਿਲਦਾ ਹੀ ਨਹੀਂ ਹੈ ਬਖਸ਼ਿਸ਼ ਦੇ ਬਿਨਾਂ ਸੁਣਨ ਨੂੰ ਨਹੀਂ ਮਿਲਦਾ ਜੇ ਸੁਣਨ ਨੂੰ ਮਿਲ ਜਵੇ ਮੰਨ ਲਵੇ ਫਿਰ ਉਦੋਂ ਉਧਰ ਹੋਰ ਬਖਸ਼ੇ ਹਨ ਮਨ ਦੇ ਕਰਨੇ ਕਰਨੇ ਚਲੋ ਸਿਖਾਣੇ ਘਰ ਜਾਣ ਨੂੰ ਤੁਹਾਨੂੰ ਮਿਲ ਗਿਆ ਮਨ ਦੇ ਕਰਨੇ ਕਰਨੇ ਉਹ ਹੋਰ ਬਖਸ਼ੇ ਹਨ ਉਹਨਾਂ ਦੇ ਕਨੇਰੀ ਬਖਸ਼ੇ ਚ ਜਿਨ੍ਹਾਂ ਨੇ ਗੁਰਬਾਣੀ ਸੁਣ ਲਈ ਸਿਖਾਣੇ ਕਾ ਜਾਨਵਰ ਮੰਨ ਲਈ ਇੱਕ ਸਮਝ ਕੋ ਵੀ ਨਹੀਂ ਮੰਨਦੇ ਇੱਕ ਸੁਣਦੀ ਸਾਰੇ ਮੰਨ ਜਾਂਦੇ ਨੇ ਇਹ ਸੁਣਦੇ ਸਾਰੇ ਮੰਨ ਜਾਂਦੇ ਨੇ ਬਦਲ ਜਾਂਦੇ ਨੇ ਉਹਨਾਂ ਤੇ ਬਖਸ਼ਿਸ਼ ਕਰ ਦੇਰੀ ਹੁੰਦੀ ਹੈ ਕਿਸੇ ਵਿਗਨ ਲੱਗ ਗਿਆ ਕੋਈ ਜੀਵਨ ਮੁਕਤ ਕਿਉਂ ਹੋਏ ਭੈ ਕਾ ਸੰਜਮ ਜੇ ਕਰੇ दारू ਪਾਉ ਲਾਏ ਇਹ ਗੱਲਾਂ ਸਾਰੇ ਕਰਦੇ ਨੇ ਜੀਵਨ ਮੁਕਤ ਹੋਣ ਦੀਆਂ ਸਾਰੇ ਧਰਮ ਵਾਲੇ ਕਰਦੇ ਸਾਰੇ ਸੰਤ ਕਰਦੇ ਨੇ ਪਰ ਇਹ ਨਹੀਂ ਦੱਸਦਾ ਕਿ ਕਰ ਰਹੇ ਨੇ ਉਸੇ ਗੱਲ ਦਾ ਗਲਤੀ ਜਗ੍ਹਾ ਤੇ ਹੋ ਜੀਵਨ ਮਰਨੇ ਗੱਲਾਂ ਜੀਵਨ ਮੁਕਤ ਸਾਰੀ ਕਹਿੰਦੇ ਪਰ ਹੋਊਗਾ ਕਿਵੇਂ ਵੀ ਨਹੀਂ ਦੱਸਦਾ ਕੋਈ ਸਮਝਾ ਕੇ ਨਹੀਂ ਸਮਝਾ ਨਹੀਂ ਰਿਹਾ ਕੋਈ ਵੀ ਗੱਲ ਨਹੀਂ ਕਰੀ ਜਾਂਦੇ ਹਾਂਜੀ ਭੈ ਕਾ ਸੰਜਮ ਜੇ ਕਰੇ दारू ਪਾਉ ਲਾਏ ਜੇ ਭੈ ਕਾ ਸਨਿਮ ਕਰੇ ਹੁਕਮ ਦੇ ਵਿੱਚ ਚੱਲੇ ਰਮੇਸ਼ਾ ਦੇ ਹੁਕਮ ਦੀ ਤਾਇ ਮੰਨੇ ਪਰਮੇਸ਼ਾ ਦਾ ਤਾਇ ਮੰਨੇ ਤਾਇ ਮੰਨੂ ਤਾਂ ਆਪ ਨਹੀਂ ਕਰ ਕੋ ਜੇ ਕਲਪਨਾ ਨੂੰ ਸਾਡੀ ਜਿਹੜੀ ਆਪਣੀ ਇੱਛਾ ਹੈ ਜਿੱਦਣ ਅਸੀਂ ਉਹਨੂੰ ਕਾਲ ਬਨ ਲਿਆ ਆਪਣਾ ਨਾ ਮੇਰੀ ਇੱਛਾ ਬੇੜਾ ਕਾਲ ਹੈ ਬਸ ਫੇਰ ਇੱਛਾ ਤੋਂ ਪਹਿਲ ਗੂ ਫਿਰ ਇੱਛਾ ਤੇ ਉਹ ਵੱਲੋਂ ਇਛਾ ਨਹੀਂ ਤੇ ਕਬੀਰ ਨੇ ਕਹਿਆ ਸੀ ਕਾਲ ਕਲਪਨਾ ਕਦੇ ਨਾ ਖਾਏ ਕਾਲ ਹੀ ਥੋੜੀ ਕਲਪਨਾ ਹੀ ਤੁਹਾਡਾ ਕਾਲ ਹੈ ਫਿਰ ਨਹੀਂ ਤੁਹਾਨੂੰ ਖਾਦੀ ਜਿੱਦਣ ਸਾਨੂੰ ਇਹ ਮੰਨ ਲਿਆ ਸੀ ਸਮਝ ਆ ਗਈ ਵੀ ਜੋ ਮੇਰੀ ਇੱਛਾ ਮੇਰੀ ਕਲਪਨਾ ਇੱਛਾ ਹੈ ਉਹੀ ਕਾਲ ਹੈ ਦਾ ਜਿਹੜੀ ਪਰਮੇਸ਼ਰ ਦੀ ਇੱਛਾ ਜੀਵਨ ਚੱਲਣਾ ਜੀਵਨ ਆਪਣੇ ਬਾਣੇ ਚੱਲਣਾ ਦਾ ਇਹ ਭੈ ਦਾ ਸੰਜਮ ਕਰਨਾ ਚੱਲਣਾ ਸੰਜਣ ਬਾਗਦੇ ਫਿਰ ਇਹਨੂੰ ਪ੍ਰੇਮ ਨਾ ਮੰਨਦਾ ਸਾਨੂੰ ਜਿਹੜਾ ਨਿਰਮਲ ਭਾਉ ਹੈ ਨਿਰਮਲ ਭਾਉ ਪਾਇਆ ਕੁਰਬਾਨੀ ਦਾ ਜਿਹੜਾ ਜਿਹੜਾ ਹੁਕਮ ਦਾ ਹੁੰਦਾ ਹੈ ਇਹ ਨਿਰਮਲ ਭਾਉ ਹੈ ਸਾਡੇ ਫੈਲੇ ਦੀ ਗੱਲ ਹੈ परमेश्वर दा फायदा कोई नहीं है हां जी दारू पाओ लाए दारू हो प्रेम हो प्रेम कियो ते, प्रेम ते प्रेम मेरे फायदे वास्ते कहंदा नुकसान है जी जी प्रमिश्यला प्रमिश्यला कोई फायदा नहीं पैदा सुख सहजै बिकह भवजल नाम तरै ਫੇਰ ਦਿਨ ਰਾਤਾਂ ਦਿਨ ਨੂੰ ਬਸ ਉਹਦੇ ਗੁਣ ਗਾਇਨ ਕਰਦਾ ਜਦ ਇਹ ਸਮਝ ਆ ਜਾਂਦੀ ਉਹ ਮੇਰੇ ਫਾਇਦੇ ਵਾਸਤੇ ਸਭ ਕੁਝ ਕਰ ਰਿਹਾ ਇੰਟਰਸਟ ਨਹੀਂ ਆਪਣਾ ਉਹ ਫੇਰ ਕਹਿੰਦੇ ਆ ਜਿਹੜਾ ਮੇਰੇ ਵਾਸਤੇ ਸਭ ਕੁਝ ਕਰ ਰਿਹਾ ਨਾਮ ਦੇ ਨਾਲ ਫੇਰ ਭਵਸਾ ਦਰਸ ਸਕਦਾ ਜਿੱਦਣੇ ਨੂੰ ਪਤਾ ਲੱਗਿਆ ਵੀ ਜੋ ਗੁਰਬਾਣੀ ਕਹਿੰਦੀ ਹੈ ਮੇਰੇ ਫਾਇਦੇ ਦੀ ਗੱਲ ਹੈ ਕਿਸੇ ਦਾ ਕੋਈ ਫਾਇਦਾ ਨਹੀਂ ਮੇਰਾ ਹੀ ਨੁਕਸਾਨ ਹੈ ਨਾ ਮੰਨਣ ਕਿ ਮੇਰਾ ਹੀ ਨਦਰ ਕਰੇ ਆਹ ਗੋਲਾਗ ਕਹਿੰਦਾ ਗੁਰਮਖੀ ਪਾਈ ਹੈ ਤੇ ਸਮਝ ਜਿੱਦੇ ਤੇ ਕਿਰਪਾ ਹੋਵੇ ਵੀ ਪਾਈ ਵੀ ਮੇਰਾ ਹੀ ਫਾਇਦਾ ਹੈ ਤਾਂ ਫਿਰ ਜਿਹੜੀ ਮੇਰੇ ਫਾਇਦੇ ਦੀ ਗੱਲ ਹੈ ਮੈਂ ਨਾ ਮੰਨ ਨਾ ਤੇ ਮੈਂ ਮੂਰ ਕੇ ਹੋਇਆ ਉਹ ਕਿਹਾ ਫਾਇਦਾ ਮੇਰੇ ਲਈ ਹੋਵੇ ਗੱਲ ਤੇ ਮੈਂ ਉਹਨੂੰ ਨਾ ਮੰਨੋ ਇਹ ਤਾਂ ਮੂਰ ਹੋ ਰਿਹਾ ਪੁਰਮਖਾ ਨੇ ਮੂ ਇੱਕ ਗੱਲ ਸਮਝੀ ਹੈ ਵੀ ਹੋਰ ਖਾਣਾ ਸੀ ਅਸਲ ਦੇ ਵਿੱਚ ਨਾਮਨ ਵਾਲੇ ਬਣਦੇ ਅਸੀਂ ਸਿਆਣੇ ਅਸੀਂ ਸਿਆਣੇ ਬਣਦੇ ਦੂਜਾ ਪਾਉ ਵਰਤਾਰਾ ਹੈ ਦੋਸਰੀ ਸਾਡੇ ਇੱਕ ਬਹਲਾ ਕਰ ਦਿੰਦਾ ਇੱਕ ਤਾਂ ਸਾਡੇ ਕੋਲ ਨਹੀਂ ਆਇਆ ਸਾਡੇ ਅੰਦਰ ਮਾਇਆ ਦੀ ਭੁੱਖਾ ਮਾਇਆ ਵਾਸਤੇ ਸਾਡੇ ਅੰਦਰ ਪ੍ਰੇਮ ਹੈ ਡਰ ਹੈ ਨਾ ਹੋ ਜਾਏ ਨਾ ਹੋ ਜਾਏ ਨਾ ਹੋ ਜਾਏ ਨੁਕਸਾਨ ਹੋ ਗੁਰਬਾਣੀ ਮੰਨ ਲਈਏ ਤਰਮ ਕਾਰਨ ਕਰ ਲਿਆ ਜੀ ਕੇ ਮੈਂ ਚੱਲੂ ਕਿਤਾ ਇਹ ਇਧਰੇ ਪਾਸੇ ਚ ਲੈ ਗਿਆ ਕਿਨੇ ਬ੍ਰਹਮ ਵਿਸ਼ਨੂੰ ਜਿਹੜੇ ਤਿੰਨ ਇਤਰਾ ਗੁਣ ਆਇਆ ਇਹ ਤਿੰਨੇ ਉਪਦੇਸ਼ ਉਲਟਾਈ ਕਰਦੇ ਨੇ ਮਾਇਆ ਦੇ ਜੋੜ ਨਾਲ ਹੀ ਨੇ ਸੱਚ ਨਾਲ ਜੋੜ ਨਾਲੇ ਦੀ ਇਹ ਤਿੰਨਾ ਗੋਣਾ ਤਾਂ ਉੱਪਰ ਉੱਠ ਕੇ ਤੁਰਿਆ ਪਦ ਤਿੰਨਾ ਦੇ ਵਿੱਚ ਖਾਲ ਹੈ ਬ੍ਰਹਮ ਪੁਰੀ ਕਾ ਵੀ ਕਾਲ ਹੈ ਬਿਸ਼ਨਪੁਰੀ ਵੀ ਕਾਲ ਹੈ ਛੇਪੁਰੀ ਤੇ ਵਿੱਚ ਵੀ ਕਾਲ ਹੈ ਤਿੰਨੇ ਕਾਲ ਵਸ ਨੇ ਚੌਥੀ ਜਿਹੜੀ ਤੁਰਿਆ ਫੜ ਹੈ ਗੁਰਮੁਖਵੀ ਉਸਤ ਹੈ ਕਾਲ ਹੈ ਕੁਰਬਾਨੀ ਸਾਨੂੰ ਕੋਈ ਪਵਿੱਤਰ ਕਰਦੀ ਹੈ ਹੋਰ ਮੰਨਾਂਗੇ ਹੋਰ ਪਵਿੱਤਰ ਕਰਦੀ ਹੈ ਹੋਰ ਮੰਨਾਂਗੇ ਹੋਰ ਪਵਿੱਤਰ ਕਰ ਬਸ ਪੁਨੀਤ ਨਹੀਂ ਕਰ ਸਕਦੀ ਕੁਰਬਾਨੀ ਪੁਨੀਤ ਨਾਮ ਕਰੂ ਬਿਨਾ ਕਰਨਾ ਤੇ ਸੁਣਨ ਵਾਲਾ ਉਹ ਚੌਥੀ ਤੁਰਿਆ ਫੜੀ ਉਸਤ ਉਹ ਫਿਰ ਬਰਮਾ ਬਿਸ਼ਰਮ ਇਹ ਤਾਂ ਤੇਰੇ ਗਣ ਮਾਇਆ ਦੇ ਵਿੱਚ ਨਿਕਲਣ ਇਹ ਦੁਨੀਆ ਕਿਨਾ ਤਿੰਨਾ ਨੂੰ ਬੰਦੀ ਹੈ ਸਾਰੀਆਂ ਮੱਤਾਂ ਇੱਥੇ ਹੀ ਗਈਆਂ ਨੇ ਚੌਥੀ ਤੁਰਿਆ ਦੀ ਗੱਲ ਤਾਂ ਇਹ ਜਿਹੜੀ ਗੁਰਬਾਣੀ ਇਹ ਤਾਂ ਫਿਰ ਸੱਚ ਕਹਣ ਦੀ ਹੈ ਸੰਸਾਰੀ ਮੱਤ ਦਾ ਮੈਸੇਜ ਨਹੀਂ ਹੈ ਉਹ ਤਾਂ ਇੱਥੇ ਬ੍ਰਹਮਾ ਮਹੇਸ਼ ਉਪਾਏ ਹਨ ਤੋਂ ਕੀ ਭਾਗ ਹੈ ਜੀ ਪੈਦਾ ਕਰ ਸਮਝ ਲੋ ਮਹੇਸ਼ ਹੀ ਜੀਵੇ ਹੈ ਤੇ ਉਪਦੇਸ਼ ਕਰਦਾ ਇਹ ਜੀ ਜੀ ਜੀਵ ਜੰਦੀਵਾਂ ਨੂੰ ਪੈਦਾ ਵੀ ਕਰਦੇ ਨੇ ਜੀਵ ਜੀਵਾਂ ਦਾ ਸੰਗਾਰ ਵੀ ਕਰਦੇ ਨੇ ਜੀਵ ਜੀਵਾਂ ਨੂੰ ਅਕਲ ਵੀ ਦਿੰਦੇ ਨੇ ਦੇ ਵਿੱਚ ਦੇ ਵਿੱਚ ਆਪਣਾ ਹੁਕਮ ਆਪਣੇ ਭਾਣੇ ਚੱਲਦੇ ਨੇ ਨਹੀਂ ਹੁਕਮ ਹੀ ਕਮਾਉਣਕਾਰ ਆ ਲਿਖਿਆ ਇਹ ਹੁਕਮ ਦੇ ਵਿੱਚ ਕਮਾਉਂਦੇ ਆਕਾਰ ਕੇ ਆਪਣਾ ਆਪਣਾ ਹੁਕਮ ਚਲਾਉਣ ਦੀ ਗੱਲ ਕਰਦੇ ਨੇ ਚਾਹੁੰਦੇ ਨੇ ਪਰ ਚੱਲਦਾ ਨਹੀਂ ਇਹਨਾਂ ਦਾ ਚੱਲਦਾ ਪਾਣੀ ਚੱਲਣਾ ਪੈਂਦਾ ਚੱਲਦੇ ਨੇ ਹੋਈ ਮੰਨਣਾ ਨਹੀਂ ਹੁੰਦਾ ਨਹੀਂ ਨਹੀਂ ਐਕਚੁਅਲੀ ਤਾਂ ਹੁਕਮ ਦੇ ਵਿੱਚੇ ਚੱਲ ਰਹੇ ਨੇ ਇਹ ਸਭ ਕੁਝ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਪਰ ਇਹ ਗੱਲ ਮੰਨਣੀ ਨਾ ਰਹੇ ਜੀਵ ਠੀਕ ਸਮਝ ਜੀਦਾ ਹੈ ਜੀ ਗੁਰਮੁਖੁਰੂ ਤਾਂ ਸੋਚ ਆ ਵੀ ਅਸੀਂ ਉਹਦੇ ਵਿੱਚ ਹੀ ਆ ਚਾਹੁੰਦੇ ਅਸੀਂ ਰਹੇ ਹਾਂ ਪਰ ਹੁੰਦਾ ਉਹ ਹੈ ਜੋ ਉਦੀ ਛੰ ਠੀਕ ਹੈ ਜੀ ਮਤਾ ਕਰਨ ਪੂਰਬ ਗਿਆ ਤਾਂ ਪਛਮੀ ਲੈ ਜਾਏ ਇਹ ਤਾਂ ਸਮਝ ਫਿਰ ਘਾਹ ਹੀ ਨਾ ਗੁਰਮੁਖੀ ਨਾ ਆਮ ਤਰ੍ਹਾਂ ਜੋਤ ਕੀ ਨਾ ਬੁੱਝੈ ਵਿਚਾਰ ਆ ਦੇਖੋ ਪੰਡਤ ਨੇ ਜਿਹੜੇ ਫਨ ਬਾਬ ਨੂੰ ਮੰਨ ਕਹਿੰਦੇ ਜੋਤਿ ਘਰੋਂ ਦੇ ਨੇ ਆ ਬਿਗ ਨਾ ਹੋ ਜੂਆ ਹੋ ਜੂਆ ਆ ਉਹ ਇਹ ਨਹੀਂ ਹੋ ਗੋ ਉਹਨੇ ਬੁੱਝਦੇ ਉਹੇ ਵਿਚਾਰ ਨੂੰ ਇੱਧਰ ਪੈਂਦੇ ਹੀ ਨਹੀਂ ਉਹ ਤਾਂ ਆਪਣੀ ਅਕਲ ਨੂੰ ਬੜੀ ਕਰਕੇ ਪਾਣੇ ਤੋਂ ਬਚਣ ਦੀ ਕੋਸ਼ਿਸ਼ ਕਰਦੇ ਨੇ ਕਾਲ ਤੋਂ ਵੀ ਬਚਣ ਦੀ ਕੋਸ਼ਿਸ਼ ਕਰਦੇ ਨੇ ਨਫਰ ਤੋਂ ਦਾ ਬੰਦੇ ਨੇ ਉਹ ਕੋਲੇ ਵੀ ਚੱਲਣ ਦੀ ਗੱਲ ਹੀ ਨਹੀਂ ਕਰਦੇ ਉਹ ਤਾਂ ਉਲਟਾ ਹਮਲੇ ਦੇ ਰਹੇ ਨੇ ਸਭ ਉਹੇ ਵਿਚਾਰ ਜਿਹੜੀ ਅੱਧੀ ਨੂੰ ਨਹੀਂ ਬਝ ਰਹੇ ਉਹ ਤਾਂ ਇਹਦਾ ਵਿਰੋਧ ਕਰ ਲੈਣੇ ਸਭ ਉਹੀ ਭਰਮਾਂ ਵਿੱਚ ਨੂੰ ਸੀ ਭਗਤ ਨੇ ਉਹਦਾ ਜਿਹੇ ਖੜੇ ਹੋਏ ਨੇ ਭਰਮਾਂ ਵਿੱਚ ਨੂੰ ਠੀਕ ਹੈ ਜੀ ਸਭ ਕੁਛ ਤੇਰਾ ਖੇਲ ਹੈ ਸੱਚ ਸਿਰਜਣ ਹਾਰਾ ਜਿਸ ਭਾਵੈ ਬਖਸ਼ ਲੈ ਸੱਚ ਸ਼ਬਦ ਸਮਾਈ ਹਾਂ ਹੁਣ ਐਕਚੁਅਲੀ ਗੱਲ ਇਹ ਹੈ ਸਭ ਕੁਝ ਵਰਤਮਾਨ ਦਾ ਤੇਰਾ ਕੀਤਾ ਹੋਇਆ ਸੱਚ ਉਹਨੂੰ ਕਿਹਾ ਪਰਮੇਸ਼ਰ ਸੱਚ ਸਿਰਜਣ ਹਾਰਿਆ ਸਭ ਕੁਝ ਤੇਰੀ ਇਛਾ ਨਾ ਪਰ ਬਣੀ ਇੱਛਾ ਨਾ ਹੋ ਰਹੀ ਐ ਨਾ ਵਿਸ਼ਨੂ ਦੀ ਇੱਛਾ ਨਾ ਹੋ ਰਹੀ ਐ ਨਾ ਮਹੇਸ਼ ਦੇਚਾ ਨਾ ਕੋਝੋ ਰਿਹਾ ਉਹ ਕਹਿੰਦੇ ਨੇ ਮੇਰੇ ਮਾਰਨ ਵਾਲਾ ਹੈ ਪੈਦਾ ਕਰਨ ਵਾਲਾ ਤਿੰਨ ਘੜੇ ਨੇ ਗੁਰਬਾਣੀ ਕਹਿੰਦੀ ਕੋਈ ਤਾਂ ਨਹੀਂ ਹੁਕਮ ਦੇ ਨਾਲ ਸਭ ਕੁਝ ਹੋ ਰਿਹਾ ਹੁਕਮ ਆਣੇ ਦੇ ਵਿੱਚ ਸਭ ਕੁਝ ਚੱਲਦਾ ਐਕਚੁਅਲੀ ਗੱਲ ਸੱਚ ਇਹ ਹੈ ਪਰ ਉਹ ਜੀ ਇਹਨੂੰ ਕਹੇ ਉਹ ਕਹਿੰਦੇ ਬ੍ਰਹਮਾ ਵਿਸ਼ਨੂ ਮਹੇਸ਼ ਇਹ ਕਰ ਰਹੇ ਨੇ ਕੱਬ ਠੀਕ ਇਹ ਹੈ ਹੁਕਮ ਕਰਦਾ ਸਿਰਜਣ ਹੁੰਦਾ ਹੈ ਜੀ ਸਿਰਜਣ ਆ ਤੂੰ ਸਿਰਜਣ ਆ ਰਹਿਣਾ ਸੱਚੇ ਤੂੰ ਇਹਦਾ ਕਿਵੇਂ ਕਾਲ ਪਾਇ ਬ੍ਰਹਮਾ ਕਾਲ ਪਾਇ ਸ਼ਿਵ ਕਾਲ ਪਾਇ ਸਗਲ ਕਾਲ ਕਾ ਕਾਲ ਦਾ ਠੀਕ ਹੈ ਜੀ ਆਪ ਕਾਲ ਵਸ ਨੇ ਜਿਸ ਭਾਵ ਹੈ ਤਿਸ ਬਖਸ਼ ਲੈ ਸੱਚ ਸ਼ਬਦ ਸਮਾਈ ਹਾਂ ਜੀ ਨੂੰ ਤੇਰੀ ਇਛਾ ਹੁੰਦੀ ਹੈ ਕੁਝਾਇ ਦੀਆਂ ਮਰਜੀ ਬਖਸ਼ੇ ਉਹ ਉੱਥੇ ਸੁਪਰੀਮ ਮਰਜੀ ਬਖਸ਼ੇ ਤੈਨੂੰ ਕੋਈ ਪੁੱਛਣ ਵਾਲਾ ਵੀ ਇਹਨੂੰ ਕਿਉਂ ਬਖਸ਼ਦਾ ਇਹਨੂੰ ਤੇ ਮਾ ਤੇਰੇ ਵਿੱਚ ਸਮਾ ਜਾਂਦਾ ਜੀ ਮਤਲਬ ਇੱਥੇ ਤੇਰੀ ਬਖਸ਼ਿਸ਼ ਹੋ ਜਾਂਦੀ ਹੈ ਸ਼ਬਦ ਸਭਾਈ ਤੇਰੇ ਹੁਕਮ ਦੇ ਵਿੱਚ ਸੱਚੇ ਸ਼ਬਦ ਦੇ ਸਮਾ ਜਾਂਦਾ ਠੀਕ ਹੈ ਜੀ ਹਾਂ ਚੌਥੀ ਪੌੜੀ ਸਮਾਪਤੀ ਹੈ ਜੀ